tarana arag maskan bhaganam saalan taratamanta antapapilata sabira na astaqilam ਜਿਨੇ ਹੈਗੇ ਨੇ ਜਾਣ ਵਾਸਤੇ ਬੈਠੇ ਨੇ ਜਿਨੇ ਆਉਣਗੇ ਜਾਣ ਵਾਸਤੇ ਆਉਣਗੇ ਯਾਦ ਰਹਿ ਤੇ ਮੈਨੂੰ ਮੌਤਾ ਕੀ ਡਰ ਦਿੰਦੇ ਜੇ ਮੈਂ ਆਪਣਾ ਸਰੀਰ ਛੱਡ ਸਕਨਾ ਵਾ ਪਿੰਡ ਪਰੇ ਦੋਹਰ ਕੋਣ ਗਾਇ ਪਿੰਡ ਮੇਰਾ ਚਲਾ ਜਾ ਪਾ ਮੇਰੇ ਸਰੀਰ ਟੁਕੜੇ ਟੁਕੜੇ ਹੋ ਜਾਏ ਮੈਂ ਆਪਣੀ ਗੁਰੂ ਦਾ ਬਚਨ ਨਹੀਂ ਛੱਡਣਾ ਜੋ ਮੈਨੂੰ ਗੁਰੂ ਨੇ ਦਿੱਤਾ ਹੋਇਆ ਹੈ ਗੁਰਮੰਤਰ ਦੀਨੋ ਕਾਨ ਤੇ ਜੇ ਗੁਰੂ ਨੇ ਮੰਤਰ ਨਹੀਂ ਦਿੱਤਾ ਤੇ ਜਿਨੇ ਵੇਦ ਸ਼ਾਸਤਰ ਮੰਦ ਸਭ ਕੁਝ ਪੜ੍ਹੇ ਨੇ ਕਿਸੇ ਕੰਮ ਦੇ ਨਹੀਂ ਜਿੰਦੇ ਕੋਲ ਗੁਰੂ ਦਾ ਮੰਤਰ ਹੈ ਕਬੀਰ ਨੂੰ ਸੁਟਿਆ ਬਈ ਡੋਬ ਕੇ ਮਾਰਦੇ ਹੋ ਕਬੀਰ ਕਹਿੰਦਾ ਮੇਰੇ ਕੋਲ ਗੁਰੂ ਦਾ ਮੰਤਰ ਸੀ ਮੈਨੂੰ ਇਉਂ ਜਾਪਿਆ ਜਿਵੇਂ ਮਿਰਗਸ਼ਾਲਾ ਪਰ ਬੈਠੇ ਕਬੀਰ ਮੇਰੀਆਂ ਭਾਈ ਬਨ ਕੇ ਹਾਥੀ ਖੂਨੀ ਦੀ ਅਗੇ ਸ਼ਰਾਬ ਪਿਆ ਕੇ ਛੱਡ ਦਿੱਤਾ ਮੈਨੂੰ ਛੱਡ ਦਿੱਤਾ ਅਗੇ ਤੇ ਹਸਤ ਪਾ ਕੇ ਚੀਸਾ ਮਾਰੇ ਮੈਨੂੰ ਵੇਖ ਕੇ ਹਾਥੀ ਡਰਦਾ ਸੀ ਕਹਿੰਦਾ ਸੀ ਸ਼ੇਰ ਬੈਠਾ ਹੋਇਆ ਹੈ ਪਰ ਦਰ ਅਸਲ ਮੈਂ ਨਹੀਂ ਸਾਂ ਮੇਰੇ ਗੁਰੂ ਦਾ ਸ਼ਬਦ ਸੀ ਹੈ ਮੇਰੇ ਠਾਕੁਰ ਤੁਮਰਾ ਜੋਰ ਕਾਜ਼ੀ ਬਕੋ ਹਸਤੀ ਤੋ ਹੈ ਮੇਰੇ ਠਾਕੁਰ ਕਿ सी ਤਾਂ ਤੇਰਾ ਸੀ ਤੇਰੇ ਸ਼ਬਦ ਦਾ ਜੋਰ ਸੀ ਪਰ ਕਾਜ਼ੀ ਜਿਹੜਾ ਸੀ ਨਾ ਉਹ ਕਹਿੰਦਾ ਸੀ ਓਏ ਥਾਵਾਂ ਇਹੋ ਕਰਕੇ ਪੁਤਾ ਸ਼ਰਾਬ ਪਿਆ ਉਹ ਸ਼ਾਮਾ ਬੁੱਝ ਲੈ ਸਕਦੇ ਕਿ ਸਰੋਸ਼ਣ ਖੁਦਾ ਕਰੇ ਉਹ ਐਸਾ ਕਰ ਸੀ ਤੇ ਕਹਿੰਦੇ ਸੀ ਪ੍ਰਹਿਲਾਦ ਨੂੰ ਤਤੇ ਥੰਮਦੇ ਜਦੋਂ ਸਾਹਮਣੇ ਕੀਤਾ ਤੇ ਉਹਨੂੰ ਚਾਹ ਚੜਿਆ ਉਹ ਕਹਿਣ ਲੱਗਾ ਆ ਮੇ ਪਾ ਵਿਲ ਪਾਵਰ ਜ਼ਿਆਦਾ ਹੋਵੇ ਕਿ ਖਿਆਲ ਲੈਣਾ ਤੇ ਆਏ ਕਰਕੇ ਜਿਸ ਨੇ ਜੱਫੀ ਪਾਈ ਤੇ ਕਹਿਣ ਲਗਾ ਅਗਨੀ ਮੇਰਾ ਮਹਿਬੂਬ ਹੈ ਇੱਕ ਸਿੱਖ ਵਿੱਚ ਉੱਠ ਕੇ ਕਹਿੰਦਾ ਜੀ ਅੱਜ ਵੀ ਕੋਈ ਇਹੋ ਜਿਹਾ ਹੋਵੇਗਾ ਜਿਹੜਾ ਮੌਤ ਨੂੰ ਜੱਫੀ ਪਾਉਂਦਾ ਹੋਵੇਗਾ ਇੱਕ ਰਗੜ ਕੇ ਆਖੋ ਤੁਹਾਨੂੰ ਗੁਰੂ ਅਸਿੰਦ ਦੇ ਕਹਿਣ ਲੱਗੇ ਚੰਗਾ ਜੇ ਤੂੰ ਦੇਖਣਾ ਤਾਂ ਜਿਸ ਦੇ ਦਿਲ ਦੇ ਵਿੱਚ ਗੁਰੂ ਦਾ ਸ਼ਬਦ ਹੈ ਦੇਖਣਾ ਹੈ ਨਾ ਆਖਿਆ ਤਾਂ ਜਾਫਰullah ਉਰਦੂ ਆਜਾ ਤੇ ਉਹ ਸਿੱਖ ਨੂੰ ਆਖੀ ਸਤ ਗੁਰਾਂ ਨੇ 500 ਰੁਪਏ ਮੰਗਵਾਏ ਤਲਾਖਟਿਆਂ ਦੀ ਅਸਵਾਰੀ ਉਹਦੀ ਅਸਵਾਰੀ ਲੱਗੀ ਹੋਈ ਏ ਤੇ ਉਗਰਾਹੀ ਮੰਗੀ ਏ ਜੂ ਪਾਲਣ ਲੱਗਾ ਅੱਲਾ ਬਦੱਲਾ ਬਦੱਲਾ ਬਦੱਲਾ ਕਿਸੇ ਅਮੀਰ ਦੇ ਮਕਾਨ ਦੇ ਨਾਲ ਮਾੜੀ ਜੀ ਛਪਰੀ ਇੱਕ ਤੋਂ ਮਿੱਟੀ ਦੇ ਬਰਤਨ ਪਿਆ ਖੜਾ ਮਟਕ ਦਾ ਭਰਿਆ ਮਟਕਾ ਇੱਕ ਮੰਜੀ ਪੱਠੇ ਦੀ ਹਣੀ ਹੋਈ ਤੇ ਉੱਤੇ ਬੈਠਾ ਆ ਤੇ ਬੜੇ ਰੰਗ ਦੇ ਨਾਲ ਪਿਆ ਕਹਿੰਦਾ ਸੀ ਤਨਮਨ ਕਾਟਕਾ ਤੇ ਗੁਰੂ ਦੇ ਬਚਨ ਦੇ ਨਾਲ ਰੰਗਿਆ ਹੋਇਆ ਇਨੇ ਜਾ ਕੇ ਜिले ਤਕਿਆ ਤੱਕ ਲਗੋ ਮਹਾਰਾਜ ਦੇ ਘਰ ਨਹੀਂ ਆਏ ਇਹ ਤਾਂ ਭੁੱਖਾ ਤੇ ਨੰਗਾ ਕੰਗਾਲ ਆਦਮੀ ਹੈ 500 ਰੁਪਏ ਕਿੱਥੋਂ ਦੇਗਾ ਸਤਗੁਰੂ ਸਿੱਖ ਦੀ ਬੜੀ ਕਿਰਪਾ ਕਰਕੇ ਤੇ ਇਹ ਸਮਝ ਕਲੋ ਜਦੋਂ ਪ੍ਰੀਖਿਆ ਵੀ ਲੈਂਦਾ ਨਾ ਕਮਾਲ ਕਰ ਦਿੰਦਾ ਯਾਦ ਹੈ ਮੈਂ ਤੁਹਾਨੂੰ ਇੱਕ ਨਵੀਂ ਚੀਜ਼ ਅੱਜ ਦੱਸਾਂ ਤੁਹਾਨੂੰ ਪਤਾ ਲੱਗੇ ਗੁਰੂ ਤੇ ਸਿੱਖ ਦਾ ਮਿਸਾਲ ਕੀ ਹੁੰਦੀ}{|\} ਗੱਲਾਂ ਮੂੰਹ ਨਾਲ ਤਾਂ ਸਾਰੇ ਕਰਦੇ ਨੇ ਜਾ ਕੇ ਕਹਿੰਦਾ ਭਾਈ ਲੱਗਾ ਤੂੰ ਕਹਿੰਦਾ ਭਾਈ ਲੱਦਾ ਨਹੀਂ ਸਾਈ ਲੱਦਾ ਮੈਨੂੰ ਸਾਈ ਲੱਭ ਗਿਆ ਇਹਨੂੰ ਮਾਲਕ ਮਿਲ ਗਿਆ ਮਥਾ ਜੀ ਕਹ ਤੂੰ ਕਿੱਥੋਂ ਕਹਿੰਦਾ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਆਇਆ ਅੰਬਰਸਰੋਂ ਛੱਤੀ ਹਾਲੋਟ ਕੇ ਸਿੱਕੇ ਦੇ ਚਰਨਾ ਉੱਤੇ ਟੇਕਿਆ ਮਥਾ ਅੱਖਾਂ ਦੇ ਗਰਮ ਪਾਣੀ ਨਾਲ ਚਰਨ ਧੋ ਦਿੱਤੇ ਬਲੇ ਹਾਰ ਬਲੇ ਹਰ ਜਿੰਨਾ ਪਛਾਤਾ ਸੱਚਾ ਚੁੰਮਾ ਪੈਰ ਮੂੰ ਮੈਂ ਨਾ ਮੈਂ ਉਹਨਾਂ ਦੇ ਪੈਰ ਮੈਂ ਚੁੰਮਾ ਜਿਨ੍ਹਾਂ ਨੇ ਸੱਚ ਨੂੰ ਪਛਾਤਾ ਬੜੇ ਸ਼ੌਕ ਦੇ ਨਾਲ ਸਿੱਖ ਤੇ ਚਰਨਾ ਉਤੇ ਲੇਟਸ ਦਾ ਫਿਰਦਾ ਹੈ ਅੱਖ ਲਗਾਉ ਤਨ ਭਾਗ ਨੇ ਸਿੱਖਾ ਤੋ ਦਰਸ਼ਨ ਦਿੱਤੇ ਨੇ ਸਤਿਗੁਰੂ ਜੀ ਦਾ ਕੀ ਹਾਲ ਹੈ ਚੰਗੇ ਨੇ ਨਾ ਸਾ ਸੰਗਤ ਬੜੀ ਆਈ ਹੋਣੀ ਹੈ ਬੜਾ ਮੇਲਾ ਲੱਗਦਾ ਹੋਣਾ ਬੜੇ ਸੋਹਣੇ ਉਹਨੇ ਕਿਹਾ ਕੀ ਪੁੱਛਣਾ ਪਰ ਮੈਂ ਤਾਂ ਹੈਰਾਨ ਹੋ ਗਿਆ ਤੈਨੂੰ ਵੇਖ ਕੇ ਕਹਿੰਦਾ ਕਿ ਸਤਿਗੁਰੂ ਨੇ ਤਾਂ ਬੜਾ ਵੱਡਾ ਤੈਨੂੰ ਸਵਾਲ ਪਾਇਆ ਤੇ ਤੂੰ ਕੀ ਕਰੇਗਾ ਕਹਿੰਦਾ ਕੀ ਸਵਾਲ ਪਾਇਆ ਕਹੋ ਸਤਿਗੁਰੂ ਸੱਚੇ ਪਾਏ ਦਾ ਹੁਕਮ ਹੈ ਮੈਂ ਪਾਇ ਲਦੇ ਨੂੰ ਕਹੋ ਅੰਮ੍ਰitsar ਦੇ ਤਲਾਹ ਦੀ ਉਗਰਾਈ 500 ਰੁਪਏ ਦੇਵੇ ਛਾਲਾ ਮੰਨ ਲਾ ਉੱਚੀ ਉੱਚੀ ਛਾਲਾ ਮੰਨ ਲਾ ਕੱਚਾ ਮਾਰਨ ਲੱਗਾ ਕਹਿੰਦਾ ਉਹ ਤੇਰੇ ਕੋਲ ਕੁਛ ਹੈ ਕਹਿੰਦਾ ਕਿਉਂ ਕਹਿੰਦਾ ਗੁਰੂ ਦਾ ਬਚਨ ਬਸੇ ਜੀ ਨਾਲ ਹੈ ਮੇਰੇ ਸਤਗੁਰੂ ਦਾ ਬਚਨ ਇਹ ਉਹ ਹਰ ਕੋ ਨਾਮ ਕਿਤਾ ਹਰ ਦਾ ਜਿਹੜਾ ਨਾਮ ਹੈ ਮੇਰੇ ਕੋਲ ਹੈ ਮੇਰੇ ਸਤਗੁਰੂ ਦਾ ਬਚਨ ਮੇਰੇ ਕੋਲ ਹੈ ਕਹਿੰਦਾ ਉਹ ਨਾ 500 ਰੁਪਇਆ ਮੰਗਿਆ ਕਹਿੰਦਾ ਨਾ ਮੰਗਿਆ ਹੀ ਤਾਂ ਜ ਸਾਧਨ ਵੀ ਕਰ ਦੇਣਗੇ ਤਾਂ ਮੈਂ ਕੀ ਕਰਨਾ ਜਿਸका ਘਾਰ ਹੈ ਤੁਸੀਂ ਕੀਆ ਮਾਨਸ ਕਿਆ ਵਿਚਾਰਾ ਕਹਿਣ ਲੱਗਾ ਤੇਰੇ ਕੋਲ ਪੰਜ ਕੌਡੀਆਂ ਹੈਂ ਕਹਿੰਦਾ ਉਹਨੂੰ ਪੰਜਾਂ ਗੋਲੀਆਂ ਦੀ ਲੋੜ ਹੀ ਕੀ ਹੈ ਜਿਸ ਨਾਮ ਦੇ ਤੇ ਸੋਈ ਵੱਡ ਰਾਜਾ ਜਿਸ ਨਾਮ ਦੇ ਕਾਜਾ ਜਿਸ ਨਾਮ ਦੇ ਉਹ ਵੱਡੇ ਤੋਂ ਵੱਡਾ ਰਾਜਾ ਹੈ ਜਿਸ ਨਾਮ ਦੇ ਤੇਨੂੰ ਕੋਟ ਤਨ ਪਾਏ ਨਾਮ ਬਿਨਾ ਜਨਮ ਫਿੱਥਾ ਜਾਏ ਮੇਰੇ ਕੋਲ ਸਤਿਗੁਰੂ ਦਾ ਬਚਨ ਹੈ ਗੁਰका ਬਚਨ ਬਸੇ ਦੀ ਨਾਲ ਖਿਆਲ ਲਾ ਗੁਰਸਿੱਖਾ ਤੂੰ ਇੱਕ ਬੈਠ ਮੈਂ ਤੇਰੇ ਵਾਸਤੇ ਜਲ ਪਾਣੀ ਲੈ ਕੇ ਆਵਾਂ ਕੀ ਲੈ ਕੇ ਆਵੇਂਗਾ ਜੋ ਮੇਰੇ ਸਤਿਗੁਰੂ ਨੇ ਜਨਾਇਆ ਤੂੰ ਬੈਠ ਕਹਿੰਦਾ ਮੈਂ ਤੇਰਾ ਦਰਸ਼ਨ ਕਰਕੇ ਰੱਜ ਗਿਆ। ਕਿਰਪਾ ਕਰ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਅਤੇ ਤੂੰ ਕਹਿੰਦਾ ਨਹੀਂ ਸਿੱਖ ਦੇ ਘਰ ਸਿੱਖ ਆ ਕੇ ਜਲ ਪਾਣੀ ਛਕ ਤੋਂ ਬਿਗਾਰੇ ਕੇ ਚਲਾ ਜਾਏ ਤਾਂ ਸਿੱਖ ਦੇ ਉੱਤੇ ਸਤਿਗੁਰੂ ਦੀ ਸਾਰ ਸਤੀ ਹੁੰਦੀ ਏ। ਸਤਿਗੁਰੂ ਦੀ ਕਹਿਰ ਦੀ ਨਜ਼ਰ ਹੁੰਦੀ ਏ। ਪਤਾ ਨਹੀਂ ਆਇਦ ﺍﻟਖੁਦਾ ਕੇ ਬੰਦੋਂ ਸੇ ਨਾ ਹੋ ਦੇਖਣਾ ਕਿ ਇਹਨਾਂ ਵਿੱਚ ਖੁਦਾ ਨਾ ਹੋ। ਸਤਿਗੁਰੂ ਵੀ ਸਿੱਖ ਬਣ ਕੇ ਆ ਜਾਂਦਾ ਸਿੱਖ ਦੇ ਘਰ 'ਚ। ਇਸ ਵਾਸਤੇ ਮੈਂ ਜਾਣਾ ਜੇ ਲਿਆ ਕੇ ਗਿਆ ਤਾਂ ਗਲਜ ਪਾਇਆ ਢੋਲ ਕਹੇ ਲਗਾ ਮਸਕੀਨੀਆ ਪੁਲਵਾਨ ਦੇ ਨਾਲ ਜਿਹੜਾ ਖੁੱਲੇਗਾ ਜਿਹੜਾ ਟਹਿ ਜਾਏਗਾ ਉਹਨੂੰ 500 ਰੁਪਈਆ ਮਿਲੇਗਾ ਜਿਹੜਾ ਟਾਹ ਲੈਗਾ ਉਹਨੂੰ 1100 ਰੁਪਈਆ ਮਿਲੇਗਾ ਹਫਤਾ ਹੋ ਗਿਆ ਸੀ ਢੋਲ ਵੱਜਦੇ ਨੂੰ ਜਦੋਂ ਇਹਨੇ ਸੁਣਿਆ ਤੇ ਢੋਲਣ ਕਹਿੰਦਾ ਗੱਲ ਸੁਣ ਮੇਰੀ ਕਿ ਹਾਂ ਮੇਰਾ ਨਾਂ ਪੇਸ਼ ਕਰਦੇ ਮੈਂ ਮਸਕੀਨੀ ਨਾਲ ਭੁਲਣਾ ਹੁਣ ਵੀਲ ਪਾਵਰ ਕਿਸ ਚੀਜ਼ ਦੀ ਏ ਸਤਿਗੁਰੂ ਦੇ ਸ਼ਬਦ ਦੀ ਏ ਇਕ ਰਗਾਜ ਕੀ ਹਕੂ ਧੰ ਗੁਰੂ ਅਰਜਨ ਦੇ ਵਾਸ ਗੁਰ ਬਚਨ ਬਸੇ ਜੀ ਨਾਲੇ ਜਦ ਕਿ ਆਪ ਕੋ ਧੰਸਾ ਗੁਰੂ ਪ੍ਰਤਾਪ ਸਿੰਘ ਸਾਹਿਬ ਦੇ ਪਾਸ ਸ਼ਾਹ ਦੂਰ ਕਹਿੰਦੇ ਹੁੰਦੇ ਸਨ ਜਿੰਨੇ ਟਾਈਮ ਦੇ ਉੱਪਰ ਜਿਸ ਮੌਕੇ ਸਾਰੇ ਪਹੁੰਚੇ ਜਿਸ ਮੌਕੇ ਤੇ ਸਾਰੇ ਸਾਰੇ ਸੰਬੰਧੀਆਂ ਦੋਸਤਾਂ ਮਿੱਤਰਾਂ ਉਹਨਾਂ ਬੜਾ ਪ੍ਰਭਾਵ ਸੀ ਸਾਧੂ ਸੀ ਮਹਾਪੁਰਸ਼ ਸੀ ਸਾਰੇ ਲੋਕ ਉਸ ਮੱਥਾ ਟੇਕਦੇ ਸਨ ਪਈ ਸਭ ਸੱਚੇ ਪਾਤਸ਼ਾਹ ਦਾ ਸੇਖਾ ਔਰ ਇੱਕ ਹੋਰ ਗੱਲ ਹੈ ਪਹਿਲੇ ਦਿਨ ਸਾਰੀ ਉਮਰ ਗੁਰੂ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਇਹ ਨਹੀਂ ਮੰਗਿਆ ਕਿ ਮੈਨੂੰ ਮਕਾਨ ਦੇ ਦੁਕਾਨ ਦੇ ਰੁਪਈਆ ਦੇ ਕੁਛ ਦੇ ਇਹੋ ਹੀ ਮੰਗਿਆ ਕਿ ਤੇਰੀ ਨਜ਼ਰ ਸਵਲੀ ਰਹੇ ਮੇਰੇ ਬਸ ਨਜ਼ਰ ਰੱਖ ਨਾਸੇ ਮਤਲਬ ਘਰ ਵਾਲਿਆਂ ਨੇ ਕਿਹਾ ਹੱਡ ਤੋੜ ਦੇਗਾ ਕਹਿਣ ਲੱਗਾ ਮੇਰੀ ਗੱਲ ਸੁਣ ਲੋ ਤੁਹਾਡੇ ਚਰਨਾਂ 'ਚ ਮੈਂ ਇੱਕ ਬੇਨਤੀ ਕਰਨਾ ਕਹਿੰਦਾ ਕੀ ਮੇਰੀ ਬੇਨਤੀ ਹੈ ਵੀ ਜਿਸਮੋ ਕੇ ਉੱਤੇ ਮੇਰੇ ਹੱਡ ਟੁੱਟ ਜਾਣ ਤੇ ਮੈਂ ਮਰਦ ਹੋ ਜਾਵਾਂ ਮੇਰੀ ਕਿਰਿਆ ਬਾਅਦ 'ਚ ਕਰਨੀ 500 ਰੁਪਏ ਲੈ ਕੇ ਪਹਿਲੇ ਸਿੱਖ ਨੂੰ ਦੇ ਦੇਣੇ ਸਤਗੁਰੂ ਦੇ ਹਜ਼ੂਰੀ ਵਿੱਚ ਪਹੁੰਚ ਜਾਣ ਤੇ ਬਾਅਦ 'ਚ ਮੇਰਾ ਕੁਝ ਕਰਾਂ ਇਹੋ ਸਿੱਖੀ ਜਿਹੜਾ ਪਤਾ ਲੈਣਾ ਸੀ ਵੀ ਅਜੇ ਵੀ ਕੋਈ ਹੈ ਇਕ ਰਗਾਟ ਕੀ ਆ ਕੋ ਤਨ ਗੁਰੂ ਅਰਜਨ ਦੇ ਹੈ ਕੋਈ ਅਜੇ ਵੀ ਸਤਿਗੁਰ ਨੇ ਪਾਵੋ ਕੋ ਸਮਾਨਾ ਗਿਆ ਆਖੇ ਬੰਦ ਬੰਦ ਕਟਾਏ ਆਖੇ ਮਿਸਾਲ ਨਹੀਂ ਸੀ ਮਿਲਦੀ ਖੋਪਰ ਕਟਾਏ ਪਰ ਉਹਨਾਂ ਨੂੰ ਮੁਸ਼ਕਾਂ ਬਾਈ ਬਣ ਕੇ ਸਾਡੇ ਵੇਖੋ ਨਾ ਹਜੇ ਤੱਕ ਵੀ ਤੁਸੀਂ ਕੋਈ ਫੋਟੋ ਵੇਖੋ ਤਾਂ ਪਿਸ਼ਾਣੀ ਕਰਕੇ ਕਿਲੇ ਦੇ ਨਾਲ ਬੱਦੇ ਨੇ ਹੱਥ ਤੇ ਆਈ ਕਰਕੇ ਖੋਪਰ ਲੋਹਾ ਰਹੇ ਨੇ ਤੇ ਸਤਗੁਰੂ ਰਾਮ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇ ਸਿੱਖ ਤੋਂ ਕਹਿੰਦੇ ਪੂਰੇ ਨਹੀਂ ਆਏ ਤੋਂ ਅੱਗੇ ਤੇ ਉਥੇ ਇਟਾਂ ਚੁਣ ਕੇ ਆਖਿਆ ਹੁਣ ਵੇਖ ਮਾਰ ਕੇ ਕੋਲਾ ਆਉਂਦਾ ਕਿ ਦੇ ਵਿੱਚ ਉਹ ਵੀ ਗੱਲ ਪਿਛੇ ਰਹਿ ਦੀਗੀ ਆਏ ਜ਼ਮਾਨੇ ਦੇ ਵਿੱਚ ਸਿੱਖਾਂ ਦੇ ਬੰਬ ਬਣ ਕੇ ਤੇ ਪੈਟਰਨ ਦੇ ਸਿੱਖ ਬੜੀ ਬੇਵਿਸਾਲ ਕੁਰਬਾਨੀ ਦਿੱਤੀ ਇੱਕ ਲੜਕੀ ਨੇ ਪੂਰਬੀ ਪਾਕਿਸਤਾਨ ਦੇ ਵਿੱਚ ਆਪ ਬੰਬ ਬਣ ਕੇ ਥੱਲੇ ਪਾ ਕੇ ਤੇ ਉਡਾ ਕੇ ਦੁਸ਼ਮਣ ਨੂੰ ਲੜਕੀ ਨੇ ਦੁਨੀਆ ਉੱਤੇ ਕਹਿੰਦੇ ਸ਼ਹੀਦਾਂ ਦੀ ਜਿਵੇਂ ਸਾਲ ਖਤਮ ਹੋ ਜਾਏ تاکہ دنیا ختم ہو جائے گی کمزور نربل قوام سے خوراک تاں بالا آئے گا پتلا تو جسہ ماڑو گا تو نہیں کھاپل جائے گا اے ماڑیاں جو ناڑیاں مالش تو ہرییاں ہوسن جو قرنگے دسیا ہوندا مکھن کھا مل جائے گا پر کمزور نربل قوم جو ہونا نہ بھلی پائے گی چربی شہیداں دی جدوں تکرملی نہیں جائے گی اس قوم نے شہید پیدا کیتے نہیں تے پہلے قوم آپ تتی تبی اوتے بیٹھ کے والے دسیا ہے قوم دے مالک نے اور پھر اس تو بعد قوم سی جڑی اونے اپنے سب کو ہودی تھی تے شاید اس जोश करें शायद के वो जीना छोड़ देते हैं खिलौना जिसमें अपने का खुशी से फोड़ देते हैं हुरों की नासरत है नतस तो ताज की बालम खुदा भी दे खुदाई तो वापस मोड़ देते हैं खुदा आदमी की खुदाई भी मोड़ दे ख्याल देना तो मेरा कांतो मतलब जिस मौके पे <laughs> ਜਦੋਂ ਤੂੰ ਪੰਜਾ ਲਿਆ ਤੇ ਕਹਿਣ ਲੱਗਾ ਤੂੰ ਤਾਂ ਮਾੜਾ मस्कीनिया ਹੈ ਮਸਕੀਨੀਆਂ ਕਹਿੰਦਾ ਹੈ ਕਹਿੰਦਾ ਮੈਂ ਭਾਵੇਂ ਮਾੜਾ ਪਰ ਗੁਰ ਕਾ ਬਚਨ ਬਸੇ ਜੀ ਨਾਲੇ ਗੁਰ ਕਾ ਇਹ ਸੂਰਜ ਪ੍ਰਕਾਸ਼ ਦਾ ਕਹਿਣਾ ਹੈ ਮੇਰੀ ਗੱਲ ਨਹੀਂ ਤੇਰੇ ਗੁਰੂ ਦਾ ਬਚਨ ਸੁਣੋ ਕਪੜੇ ਲਾ ਕੇ ਤੇ ਅਰਦਾਸ ਕੀਤੀ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕਵਨ ਜਿਸ ਤੂੰ ਰਖਵਾਲਾ ਜਿਤਾ ਤਿਸ ਭਵਨ ਜਿਸ ਤੇਰਾ ਅੰਗ ਤਿਸ ਮੁਖ ਉਜਲਾ ਜਿਸ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ ਜਿਸ ਨੂੰ ਤੇਰੀ ਖੁਸ਼ ਨਲੇਖਾ ਪੁੱਛੀਏ ਜਿਸ ਤੇਰੀ ਖੁਸ਼ੀ ਤੇ ਨਾਉਨ ਪੁੱਛੀਏ ਪੁੱਛੀਏ ਜਿਸ ਨੂੰ ਤੂੰ ਪ੍ਰਭ ਵਾਲ ਤੇ ਸਕੇ ਮੈਂ ਸੰਦਗੀ ਜਿਸ ਨੂੰ ਤੇਰੀ ਮੇਸ ਤੇਰੀ ਬੰਦਗੀ ਕਹਿ ਕੇ ਨਿਕਲਿਆ ਜਿਸ ਮੌਕਿਆ ਤੇ ਦਸਤ ਪੰਜਾ ਲੈ ਆ ਤੇ ਜਾਦਿਆਂ ਦੀ ਪਤਾ ਨਹੀਂ ਕਿੰਨੇ ਹਾਥੀਆਂ ਕਰਵਾ ਲੈਂਦੇ ਵਿੱਚ ਕਹਿਣ ਲੱਗਾ ਓਏ ਮੈਂ ਤਾਂ ਤੈਨੂੰ ਮਾਰ ਦਿਆਂਗਾ ਹੱਡ ਤੋੜ ਦਿਆਂਗਾ ਕਹਿੰਦਾ ਪ੍ਰਭਾ ਨਹੀਂ ਕਿ ਤੂੰ ਇਸ ਤਰ੍ਹਾਂ ਕਿਉਂ ਕਰ ਰਹੇ ਕਹਿੰਦਾ ਮੇਰੇ ਸਤਿਗੁਰੂ ਨੇ ਮੇਰੇ ਕੋਲ 500 ਰੁਪਇਆ ਉਗਰਾਹੀ ਵਾਸਤੇ ਮੰਗਿਆ ਤੇ ਆਸਿਰ ਸਰੀਰ ਦੇ ਟੁਕੜੇ ਹੋ ਜਾਣ ਤੇ 500 ਸਤਿਗੁਰ ਦਾ ਮੱਛਨ ਬਣਿਆ ਜਾ ਤੇ ਬੜੀ ਖੁਸ਼ੀ ਦੀ ਗੱਲ ਸੀ ਸੇਰ ਸਰ ਲੋਕ ਸਿੰਘ ਐਸ ਮੌਕੇ ਤੇ ਕਰੋੜਾਂ ਰੁਪਇਆ ਦਾ ਮਾਲਕ ਐ ਇੱਕ ਰਾਗ ਜਿੱਕੇ ਅਖੋਤਨ ਸਤਿਗੁਰ ਜੀ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੁਰੂ ਕੀ ਨੀਸਤੀ ਦਾ ਮਾਲਕ ਐ ਅਸੀਂ ਲੋਕ ਜਿਸ ਮੌਕੇ ਤੇ ਚਲੇ ਜਾਂਦੇ ਆ ਸਾਨੂੰ 100 ਰੁਪਇਆ ਐਵੇਂ ਫੜਕਾ ਕੇ ਦੇ ਦਿੰਦਾ ਵੀ ਸੰਤਾ ਆ ਕੇ ਨਾ ਚਲੋ ਮੱਥਾ ਟੇਕ ਦਿਓ ਸਾਡੀ ਗੱਲ ਐ ਮਗੂਲੀ ਕਰੋਣਾ ਰੁਪਿਆ ਦਾ ਮਾਲਕ ਕਰ ਕੀ ਮੈਂ ਤੁਹਾਨੂੰ ਦੱਸਾਂ ਖਿਆਮ ਦੇ ਵਿੱਚ ਉਹਨਾਂ ਦੇ ਬਜ਼ਾਰਾਂ ਦੇ ਬਜ਼ਾਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਜ਼ਾ ਦੇ ਨਾਲ ਉਹਨਾਂ ਦੇ ਲੜਕੇ ਦੀ ਮੰਗਣੀ ਹੋਈ ਤੇ ਨਾਮਧਾਰੀਆਂ ਵਿੱਚ ਇੰਨੀ ਗੱਲ ਹੈ ਮੇਰੀ ਲੜਕੀ ਤੇ ਮੈਂ ਕਿਹ ਨਾਲ ਕਹਾਂ ਤਾਂ ਬਚਨ ਹੀ ਕਰ ਦਿੱਤਾ ਚੰਗਾ ਵੀ ਸਾਸਰੀ ਘਰ ਇਹ ਕਨਿਆ ਤੁਹਾਡੀ ਹੋਈ ਇਹ ਬੱਚਾ ਤੁਹਾਡਾ ਮੇਰਾ ਹੋਇਆ ਬਸ ਹੋਰ ਕੁਝ ਨਹੀਂ ਸਵਰ ਰੁਪਿਆ ਵੀ ਨਹੀਂ ਜ਼ਿਆਦਾ ਕਰਨ ਤੇ ਅਰਦਾਸ ਕਰ ਦੇਣੀ ਬਸ ਇਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜ਼ਮਾਨੇ ਦੇ ਸੱਚੇ ਪਾਸ਼ਾ ਜ਼ਮਾਨੇ ਦੇ ਵਿੱਚ ਇਸ ਮੌਕੇ ਉਤੇ ਬਹੁਤਾ ਕੁਝ ਖਰਚ ਕਰਦੇ ਹੁੰਦੇ ਸਨ ਤੇ ਪੰਜ ਪੈਸੇ ਜਾਂ ਸਵਾਰ ਰੁਪਈਆ ਤੇ ਗੁਰਦੀ ਰੋੜੀ ਇਹਦੇ ਨਾਲ ਵਿਆਹ ਹੋ ਜਾਂਦਾ ਸੀ ਤੇ ਗੁਰਦੀ ਰੋੜੀ ਮੰਦੇ ਨੇ ਪ੍ਰਸ਼ਾਦ ਕਰਦੇ ਨੇ ਅਸੀਂ ਤਾਂ ਹੁਣ ਪੱਤ ਮਾਸ਼ਾ ਬਣਾਉਣੇ ਚੰਗੀ ਤਰ੍ਹਾਂ ਸਵਾਰ ਕੇ ਸਤਿਗੁਰ ਸੱਚੇ ਪਾਸ਼ਾ ਨੇ ਕੀ ਗਿਆ ਵੀ ਜਿਹੜੀ ਕੁੜੀ ਉਹਦੇ ਦੋਵੇਂ ਭਰਾ ਮੌਨੇ ਨੇ ਤੇ ਉਸ ਦਾ ਜਿਹੜਾ ਉਹਦੇ ਕੇਸ ਨੇ ਬਾਕੀ ਦੀ ਚੀਜ਼ੇ ਉਹਨੇ ਵੀ ਕਿਹਾ ਸੱਚੇ ਪਾਤਸ਼ਾਹ ਜੀ ਮੈਨੂੰ ਤੁਸੀਂ ਇਸ ਆਪਣੇ ਬਾੜੇ ਵਿੱਚ ਵਾਰ ਲਓ ਤੇ ਮੈਂ ਭੁੱਲਿਆ ਹੋਇਆ ਹਾਂ ਮੇਰੇ ਵੀ ਬੇੜੇ ਤਰ ਜਾਣਗੇ ਸਤਗੁਰੂ ਸੱਚੇ ਪਾਸ਼ਾ ਨੇ ਕਿਹਾ ਕੋਈ ਗੱਲ ਨਹੀਂ ਜੇ ਤੇਰਾ ਕਰਮ ਐਸਾ ਹੈ ਤਾਂ ਬੜੀ ਖੁਸ਼ੀ ਦੀ ਗੱਲ ਹੈ ਖੈਰ ਸਤਗੁਰੂ ਦਾ ਹੁਕਮ ਹੋ ਗਿਆ ਬਚਨ ਹੋ ਗਿਆ ਯਾਦ ਰਹਿਣਾ ਬੰਦੇ ਦੀ ਬੰਦਾ ਸਤਗੁਰੂ ਦੀ ਮੰਨਣੀ ਪੈਂਦੀ ਭਾਵੇਂ ਰਾਜਾ ਹੋਵੇ ਤੇ ਚਾਹੇ ਸਿੱਖ ਹੋਵੇ ਤੇ ਚਾਹੇ ਗਰੀਬ ਹੋਵੇ ਤੇ ਕਿੰਨਾ ਵੱਡਾ ਹੋਵੇ ਇਹ ਤੇ ਸੰਗਤ ਸਤੇ ਪਾਸ਼ਾ ਗੁਰੂ ਜੀ ਦੇ ਜੀ ਮਜੀਦਾ ਕੇ ਬੈਠਦੇ ਹੁੰਦੇ ਸਨ ਤੇ ਦੋਨੋਂ ਵਕਤ ਕਥਾਇਆਇਆ ਕਰਦੀ ਸੀ ਤੇ ਮੰਦਰ ਸਾਹਿਬ ਦੀ ਉਸ ਮੁਕਿਆ ਤੇ ਗਰੀਬ ਐ ਪਰ ਕੋਈ ਹਮਾਨਕ ਗੁਰ ਕਾ ਨਾ ਰੇ ਜੀ ਗੁਰੂ ਜੀ ਮੈਨਾਂ ਜਾਣ ਦੇ ਵਿੱਚ ਇਹ ਨਹੀਂ ਗੁਰੂ ਘਰ ਦੇ ਫੁਰਕਾ ਬਚਨ ਬਥੇ ਜੀ ਜੀ ਇੱਕਦਮ ਨਾ ਹਾਂਜੀ ਉਹ ਜੀ ਕਹਿੰਦੇ ਨੇ ਹਿਰਦੇ ਨੂੰ ਜਾਨ ਮੇਰੀ ਜਾਨ ਦੇ ਹੋ ਗਿਆ ਤੇ ਦੁੱਗਲ ਦੂਰੇ ਤੇ ਰਫਲ ਟਪਕ ਟਪਕ ਕੇ ਜਾ ਰਹੀਆਂ ਮਸਕੀਨੀਆਂ ਪਹਿਲਵਾਨ ਨੇ ਜਾ ਕੇ ਮੱਥਾ ਟੇਕ ਦਿੱਤਾ ਸੰਗਤ ਸੱਚੇ ਪਾਤਸ਼ਾਹ ਕਹਿੰਦੇ ਨੇ ਸਨਾਬੇ ਸਿਖਾ ਦਿੱਤਾ 500 ਕੇ ਨਹੀਂ ਅਕੇ ਦਿੱਤਾ ਸੁਨਾਏ ਦੇ ਕੋਲ ਰੁਪਿਆ ਕੁ ਕੋਵੇ ਛੇ ਦਿਨਾਂ ਰੁਟ ਕੇ ਕਹਿੰਦਾ ਗਰੀਬ ਨੂੰ ਅੱਜ ਖਜ਼ਾਨੇ ਪਰੇ ਇਹਨੇ ਮੇਰੇ ਕੋਲ ਤੇਰੀ ਕਿਰਪਾ ਦੇ ਨਾਲ ਪਾਇਲ ਤਾਂ ਕਹਿੰਦਾ ਕਿਵੇਂ ਲਿਆ ਲੋਕ ਕਹਿਣ ਲੱਗਾ ਮਸਕੀਨੀਆਂ ਇਹ ਦਸ ਤੂੰ ਇਹਨੂੰ ਢਾਇਆ ਕਿਉਂ ਨਹੀਂ ਕਹਿਣ ਲੱਗਾ ਗਰੀਬ ਨੂੰ ਅੱਜ ਮੇਰੇ ਮਗਰ ਕੁਝ ਵੀ ਨਹੀਂ ਸੀ ਇਹਦੇ ਮਗਰ ਤੇਰਾ ਸੀ ਮੈਨੂੰ ਢਾ ਸਕਦਾ ਇਹਦੇ ਉੱਤੇ ਤੇਰਾ ਹੱਥ ਸੀ ਮੈਂ ਤਾਂ ਹਾਂ ਪਹਿਲਵਾਨ ਪਰ ਸਾਧ ਅੰਗੁਰਾ ਮੇਰੇ ਉਤੇ ਕਿਵੇਂ ਕਿਰਪਾ ਸਕਦੀ ਯਾਦ ਸੱਚੇ ਪਾਸਾ ਕਹਿਣ ਲੱਗੇ ਮਸਕੀਨੀਆਂ ਤੂੰ ਵੀ ਮਰਦਾਂ ਵਾਲੀ ਗੱਲ ਕੀਤੀ ਤੂੰ ਇਸ ਗੱਲ ਨੂੰ ਸਿੱਧ ਕਰ ਦਿੱਤਾ ਕਿ ਮਾਨ ਹੁੰਦੇ ਹੋਏ ਨਿਮਾਨ ਤਾਨ ਹੁੰਦੇ ਹੋਏ ਨੇਤਾਨ ਕਹਿਣ ਲੱਗੇ ਤਾਰੀਖ ਤਾਂ ਲਿਖਣ ਵਾਲਾ ਗਲਤ ਲਿਖ ਜਾਏਗਾ ਜੇ ਤੂੰ ਇਹ ਕੰਮ ਕੀਤਾ ਇੱਕ ਐਡਾ ਵੱਡਾ ਹੋ ਕੇ ਇੱਕ ਗਰੀਬ ਦੇ ਨਾਲ ਇੱਕ ਸਿੱਖ ਦੀ ਇੱਜ਼ਤ ਰੱਖੀ ਹੋ ਤਾਂ ਜਾ ਸੁਖਮਣੀ ਸਾਹਿਬ ਉਸਲੇ ਉੱਝਲੀ ਜਾ ਰਹੀ ਸੀ ਉਥੇ ਸਲੋਕ ਪਾ ਦਿੱਤਾ ਕਿ ਅੰਮ੍ਰਿਤ ਵੇਲੇ ਲੋਕੀ ਤੇਰਾ ਨਾਮ ਲੈਣਗੇ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਹੰਕਾਰੀਆਂ ਨਾਨਕ ਘਰ ਬੁਗਲੇ ਤੇ ਕਿੰਦੀ ਹੋਈ ਜਿੰਦੇ ਹਿਰਦੇ ਵਿੱਚ ਸ਼ਬਦ ਸੀ ਤੇ ਜਿੰਦੇ ਉਸੇ ਸ਼ਬਦ ਨਹੀਂ ਸੀ ਆਹ ਖਿਆਲ ਲੈਣਾ ਜਰਾ ਗੁਰ ਕਾ ਬਚਨ ਬਸੇ ਜੀ ਨਾਲੇ ਜੇ ਬਚਨ ਸਤਿਗੁਰੂ ਦਾ ਦਿੱਤਾ ਹੈ ਕੰਨ ਦੇ ਨਾਲ ਸੁਣਿਆ ਹੋਇਆ ਹੈ ਕੁਣ ਕਹੀ ਜਾਣਾ ਕਿਸੇ ਦੀ ਕੋਈ ਚੀਜ਼ ਤੁਸੀਂ ਇੱਥੇ ਪਕੜ ਲਓ ਹਲਵਾਈ ਦੀ ਦੁਕਾਨ ਦੇ ਉੱਤੇ ਜਨਵਾਈ ਕੋਲ ਪੁੱਛ ਕੇ ਤੁਸੀਂ ਮਠਿਆਈ ਲੈ ਲਵੋ ਤੇ ਜਿਵੇਂ ਮਰਜ਼ੀ ਖਾਓ ਤੇ ਜੇ ਚੋਰੀ ਕਰੋਗੇ ਤਾਂ ਥਾਣਾ ਨਜ਼ਦੀਕ ਹੈ ਸੁਣ ਸੁਣਾ ਕੇ ਕਰਾਂਗੇ ਤੇ ਨਹੀਂ ਜਦ ਤੱਕ ਗੁਰੂ ਕਿਰਪਾ ਕਰਕੇ ਕੰਨ ਜਣਾ ਦੱਸੇਗਾ ਉਹਨਾਂ ਚ ਕੋਈ ਚੀਜ਼ ਨਹੀਂ ਹੋ ਸਕਦੀ ਇੱਕ ਰਾਗੜ ਕਿਹਾ ਖੋਤਾਂ ਸਤਗੁਰੂ ਪ੍ਰਤਾਪ ਸਿੰਘ ਸਾਹਿਬ ਦੱਤੇ ਸਤਗੁਰੂ ਜੀ ਕਹਿੰਦੇ ਹੁੰਦੇ ਸਾਨੂੰ ਇਹ ਤਾਂ ਜੇ ਕੰਨ ਪਸ਼ੂ ਦੇ ਕੰਨ ਵਿੱਚ ਦੇ ਦਿੱਤਾ ਜਾਏ ਤਾਂ ਪਸ਼ੂ ਨਰਕਾਂ ਨਹੀਂ ਜਾਂਦਾ ਸਵਰਗ ਨੂੰ ਜਾਏਗਾ ਤੇ ਇਸੇ ਤਰ੍ਹਾਂ ਹੀ ਸੰਤ ਪੂਰੀ ਵਾਲੇ ਉਹ ਪਸਵਾ ਦੇ ਕੰਨ ਚ ਭਜਨ ਦਿੰਦੇ ਹੁੰਦੇ ਸਨ। ਖਿਆਲ ਦੇਣਾ ਜੇ ਗੁਰੂ ਦਾ ਬਚਨ ਨਹੀਂ ਤਾਂ ਪੰਡਿਤ ਨੇ ਕਿਹਾ ਪਿਆਸ ਵੀ ਬੜੀ ਲੱਗੀ ਤੇ ਥੱਕੇ ਵੀ ਬੜੇ ਆ। ਉਹ ਜਿਹੜਾ ਦਰਸਤ ਤੇ ਉੱਥੇ ਚੱਲ ਕੇ ਆਰਾਮ ਕਰਨਿਆ ਸੂਰਜ ਪ੍ਰਕਾਸ਼ ਚ ਲਿਖਿਆ ਮੈਂ ਤਾਂ ਗੁਰੂ ਦੇ ਬਚਨ ਦੇ ਉੱਤੇ ਥੋੜਾ ਜਿਹਾ ਬੋਲਣਾ ਹੈ। ਖਿਆਲ ਦੇਣਾ ਤੇਰਾ। ਜਿਦ ਉੱਥੇ ਗਿਆ ਆਪਣੇ ਆਰਾਮ ਕਰਨ ਵਾਸਤੇ ਤੇ ਉੱਥੇ ਇੱਕ ਬਜ਼ੁਰਗ ਬਾਬਾ ਪਿਆ ਹੋਇਆ ਸੁਤਾ। ਅੱਥੇ ਆਇਆ ਵਿਚਾਰਾ। ਗੋਲ ਜੁੱਤੀ ਲੱਥੀ ਹੋਈ ਏ। ਇੱਕ ਗੋਡਾ ਉੱਪਰ ਹੈ ਤੇ ਗੋਡੇ ਦੇ ਉੱਪਰ ਇਹੋ ਕਰਕੇ ਚਰਨ ਰੱਖਿਆ ਤੇ ਚਰਨ ਦੇ ਵਿੱਚ ਪਦਮ ਤੇ ਛੇਤੀ ਨਾਲ ਹੀ ਪੰਡਤ ਬੜਾ ਸੁਣਨ ਨਜੂਮੀ ਸੀ ਸਮਝਦਾਰ ਸੀ ਚਰਨਾ ਉੱਤੇ ਮੱਥਾ ਟੇਕਿਆ ਜੇ ਮੈਂ ਗਲਤ ਕਹਿ ਰਿਹਾ ਤਾਂ ਮੇਰਾ ਲਿਆਜ ਨਾ ਕਰਿਓ ਐਂ ਕਰਕੇ ਚਰਨਾ ਉੱਤੇ ਮੱਥਾ ਟੇਕਿਆ ਇਹ ਲਗਾ ਹਾ ਇਹ ਤਾਂ ਸਵਰਗਾਂ ਦਾ ਮਾਲਕ ਹੈ ਪਰ ਲੋਕੀ ਦਾ ਨਾਥ ਤੇ ਇਹ ਥੀਕ ਵਿੱਚ ਪਿਆ ਬਾਹਰ ਗਿਆ ਬਜ਼ੁਰਗ ਬਾਬਾ ਉੱਠਿਆ ਬੜੇ ਚਿਰ ਤੋਂ ਬਾਅਦ ਜੇ ਲੇਚਿਰ ਤੋਂ ਬਾਅਦ ਉੱਠਿਆ ਤੇ ਨੇ ਫਿਰ ਨਮਸਕਾਰ ਕੀਤੀ ਉਹ ਆਸ ਕੇ ਕਹਿੰਦਾ ਪੰਡਤ ਜੀ ਤੁਹਾਨੂੰ ਨਮਸਕਾਰ ਕਰਨ ਤਾਂ ਅਸੀਂ ਇੱਥੇ ਜਾਨੇ ਤੇ ਤੁਸੀਂ ਮੈਨੂੰ ਇੱਥੇ ਨਮਸਕਾਰ ਆਪ ਕਰਦੇ ਜੇ ਅਖੇ ਕਿੱਥੋਂ ਆ ਰਹੇ ਹੋ ਕਹਿੰਦੇ ਗੰਗਾ ਤੋਂ ਛਾ ਗਿਆ ਗੰਗਾ ਤੁਹਾਨੂੰ ਗੰਗਾ ਦੀ ਕੀ ਲੋੜ ਹੈ ਅਖੇ ਕਿਉਂ ਗੰਗਾ ਤਾਂ ਤੁਹਾਡੇ ਵਰਗੇ ਚਰਨਾਂ ਦੀ ਧੂੜੀ ਲੈ ਕੇ ਪਵਿੱਤਰਤਾ ਹੀ ਆਪਣੇ ਆਪ ਦੀ ਕਰਦੀ ਤੇ ਤੁਸੀਂ ਇੱਥੇ ਕਿਦਰ ਫਿਰਦੇ ਹੋ ਬੈਠਾ ਸੀ ਨਾ ਅਰੇ ਜੁੱਤੀਆਂ ਸੀ ਹੋਈਆਂ ਦੇ ਕੋਲੋਂ ਲੰਘਿਆ ਪੰਡਤ ਕਹਿਣ ਲੱਗਾ ਅਰਧਾਸ ਚਲਣਾ ਅਰਧਕੁੰਬੀ ਤੇ ਕਹਿਣ ਲਗਾ ਕੀ ਉੱਥੇ ਕਹਿਣ ਲਗਾ ਅਰਧਕੁੰਬੀ ਇਹ 68 ਸਾਲਾਂ ਤੋਂ ਬਾਅਦ ਜਿਹੜੀ ਆਉਂਦੀ ਏ ਕਹਿੰਦਾ ਪੰਡਤ ਜੀ ਮੈਂ ਤਾਂ ਰਖਣਾ ਚਰਮਟਾ ਘਰ ਨਾਲ ਲੋਕ ਘੜਾਵੇ ਪਰ ਨਹੀਂ ਆ ਕਿੰਨੇ ਮੇਰੇ ਕੋਲ ਚਮੜੇ ਪੈਣੇ ਜੁੱਤੀਆਂ ਟੁੱਟੀਆਂ ਮੈਂ ਗੰਡਣੀਆਂ ਤੇ ਹੋਰ ਬਤੇਰਾ ਕੰਮ ਪਿਆ ਤੇ ਐਂ ਕੰਮ ਕਰੀ ਗੰਗਾ ਤੇ ਆਰ ਤੇ ਜਾ ਕੇ ਆ ਮੇਰੇ ਦੋ ਪੈਸੇ ਦੇ ਦੇ ਦੂਸਰੇ ਰੰਗ ਵਿੱਚ ਭਗਤ ਜੀ ਕਹਿਣ ਲੱਗੇ ਹਾਂ ਤੇ ਪੰਡਤਾ ਮੇਰੇ ਵੀ ਦੋ ਲਜਾਈ ਪੈਸੇ ਨਹਾ ਤੋ ਕੇ ਫਿਰ ਇਸ਼ਨਾਨ ਕਰਨਾ ਫਿਰ ਗੰਗਾ ਦੀ ਪੇਟ ਚੜਾਈ ਪੈਸੇ ਇੱਕ ਗੱਲ ਪਰ ਮੇਰੀ ਏ ਯਾਦ ਰੱਖੀ ਤੇ ਪਾਣੀ ਵਿੱਚ ਨਵੇਂ ਪਟਕਾਈ ਪੈਸੇ ਕਹੀਂ ਕਿ ਅਰਵਦਾਸ ਨੇ ਦੇ ਦਰਸ਼ਨ ਆ ਬਾ ਕੱਢੇ ਤਾਂ ਹੱਥ ਫੜਾਈ ਪੈ ਸੇ ਮੈਂ ਨਾ ਸੋਟਾਂ ਏ ਦੀ ਮੇ ਪਿਉ ਦੀਆਂ ਢੀਆਂ ਸੋਟਾਈ ਦੀਆਂ ਨੇ ਹਲਕੀਆਂ ਪੌੜੀਆਂ ਦੇਖ ਲੋ ਕਿ ਆਖੀ ਤੈਨੂੰ ਤੋਹਫਾ ਭੇਜਿਆ ਰਬਦਾਸ ਨੇ ਤੇ ਬਾਹ ਕੱਢ ਤੇ ਦਰਸ਼ਨ ਦੇ ਤਾਂ ਕਹਿੰਦਾ ਹਟ ਕਿਉਂ ਕਹਿੰਦਾ ਜਲ ਕਰਕੇ ਦਰਸ਼ਨ ਹੁੰਦਾ ਕਦੇ ਤਨ ਕਰਕੇ ਕਹਿੰਦਾ ਤੂੰ ਜਾ ਕੇ ਨਾਮ ਲੈ ਲਈ ਜੇ ਤਨ ਕਰਕੇ ਨਾਮ ਮੰਗੇ ਤਾਂ ਮੇਰੇ ਮੇਰਾ ਟਕਵਾ ਖਸ ਲਿਆ ਕਹਿੰਦਾ ਸੁੱਟ ਥੱਲੇ ਥੱਲੇ ਸੁੱਟ ਕੇ ਪੈਰ ਨਾਲ ਮਿੱਟੀ ਮਲ ਕੇ ਸੁਗਮਾਨ ਕਰਕੇ ਛੋਟੇ ਆਦਮੀ ਦੇ ਅੱਧਾ ਭਟੇ ਫਿਰ ਉਹਨੇ ਪੜ ਕੇ ਪਾਇਆ ਸਾਰੇ ਆਪਣੀ ਕਿਰਿਆ ਕਰਕੇ ਜਿਸ ਜਾਣ ਲਗਤ ਕਿ ਲਗਾ ਉਸਾ ਟਕਾ ਦੇਣਾ ਸੀ ਕੋਲੋ ਕੇ ਤੇ ਕਹਿੰਦਾ ਮਾਤਾ ਗੰਗਾ ਆ ਤੇਰੇ ਸੇਵ ਕਰ ਅਬਦਾਸ ਨੇ ਭੇਜਿਆ ਹੈ ਪਰ ਉਹਨੇ ਕਿਹਾ ਸੀ ਭਈ ਤਾਂ ਦੇਈ ਜ ਮਾਤਾ ਗੰਗਾ ਬਾਹ ਬਾ ਕੱਢ ਕੇ ਲਵੇ ਤੇ ਨਾਲੇ ਤੈਨੂੰ ਦਰਸ਼ਨ ਦੇ ਪੂਰਾ ਜਾਂ ਪ੍ਰੇਮਸ ਨੇ ਭਗਤ ਦਾ ਗੰਗਾ ਨੂੰ ਆਇਆ ਉਹਨੇ ਪਲਛਲੇ ਅੰਦਰ ਇਸਤਰੀ ਦਾ ਰੂਪ ਬਣਾਇਆ ਕਹਿੰਦਾ ਸੂਰਜ ਸ਼ਰਮਿਆ ਵੇਖ ਕੇ ਜ ਬਰਖਾ ਲਾਇਆ ਹੱਥ ਦਾ ਵੇਖ ਲਓ ਮੰਗਣ ਲਈ ਆਇਆ ਤਨ ਮੇਰੇ ਭਾਗ ਨੇ ਮੈਨੂੰ ਪਪ ਨੂੰ ਰਵਦਾਸ ਨੇ ਯਾਦ ਕੀਤਾ ਮੈਂ ਏਡੇ ਭਾਗਾ ਵਾਲੇ ਆ ਕਿ ਮੈਨੂੰ ਏਡੇ ਵੱਡੇ ਭਗਤ ਨੇ ਯਾਦ ਕੀਤਾ ਪੰਡਤ ਦੇ ਪੈਰਾਂ ਥਲੋਂ ਨਿਕਲ ਮਿੱਟੀ ਗਈ ਕਹਿੰਦਾ ਮਾਤਾ ਤੂੰ ਸੱਚਮੁੱਚ ਗੰਗਾ ਹੈ ਅਖੇ ਹਾਂ ਗੰਗਾ ਵਾਂ ਕਹਿੰਦਾ ਸਾਡੇ ਬਾਬਾ ਤੁਹਾਡੇ ਚ ਡੁੱਬ ਕੇ ਮਰ ਗਿਆ ਸਾਡੀਆਂ ਖਾਨੇ ਖੂਣੀਆਂ ਖਾ ਗਈਆਂ ਸਾਨੂੰ ਨਹੀਂ ਦਰਸ਼ਨ ਹੋਇਆ ਅੱਜ ਕਿਉਂ ਹੋ ਗਿਆ ਕਹਿੰਦੀ ਵੀ ਅੱਜ ਤੂੰ ਭਗਤ ਦਾ ਦਰਸ਼ਨ ਕਰਕੇ ਆਇਆ ਉਸ ਸਦਕਾ ਤੈਨੂੰ ਦਰਸ਼ਨ ਹੋਇਆ ਅੱਜ ਤੂੰ ਉਹਦਾ ਦਰਸ਼ਨ ਕਰਕੇ ਆਇਆ ਜਿੰਦੇ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਹੈ ਔਰ ਮੈਂ ਤਾਂ ਉਹਦੀ ਦਾਸੀ ਆ ਜਿਸ ਮੌਕੇ ਤੇ ਮੈਂ ਪਾਪਾਂ ਦੇ ਗੁਨਾਵਾਂ ਨਾਲ ਭਰ ਜਾਣੀ ਆ ਪ੍ਰਭਾਤਮਾ ਦੇ ਕੇ ਪ੍ਰਾਰਥਨਾ ਕਰਨੀ ਆ ਰਵਦਾਸ ਵਰਗੇ ਮਹਾਂਪੁਰਸ਼ਾਂ ਕੇ ਚਰਨ ਪਾ ਕੇ ਉਹਨੂੰ ਪਵਿੱਤਰ ਕਰਕੇ ਚਲੇ ਜਾਣਾ ਜਿਹੜੇ ਤੇਲੇ ਵਰਗੇ ਪਾਪੀ ਪਾਪ ਨਾ ਜਾਂਦੇ ਨੇ ਤੇ ਕਹਿਣ ਲੱਗਾ ਪੰਡਤ ਮਹਾਰਾਜ ਤੁਹਾਡੇ ਤਾਂ ਚਰਨਾਂ ਦੇ ਵਿੱਚ ਆਪ ਰਹੇ ਦੀ ਮੈਂ ਪਸੰਗ ਨਹੀਂ ਤੁਹਾਨੂੰ ਸੁਣਾਉਣਾ ਸਿਰ ਦੱਸਣਾ ਚਾਹਨਾ ਵਾ ਤੇੜੀਆਂ ਗੰਗਾ ਤੇ ਗੋਦਾਵਰੀਆਂ ਨੇ ਮਹਾਂਪੁਰਸ਼ਾਂ ਤੇ ਗੁਰੂ ਵਾਲਿਆਂ ਦੇ ਚਰਨਾਂ ਦੇ ਵਿੱਚ ਪਈਆਂ ਫਿਰਦੀਆਂ ਨੇ ਇੱਕ ਵੇਰਾ ਗੱਜ ਕਿ ਆਖੋ ਤੁਨ ਗੁਰੂ ਨਾਨਕ ਦੇਵ ਪਾਤਸ਼ਾਹ ਹਜ਼ੂਰ ਨੇ ਐਸੀ ਚੀਜ਼ ਬਣਾਈ ਉਹ ਸਤਗੁਰੂ ਰਾਮ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਰਨ ਲੱਗੇ ਉਹ ਜਿੱਥੇ ਨਾਮ ਜਪਣ ਵਾਲੇ ਪਹਿਨੀ ਸਾਹਿਬ ਜਿੱਥੇ ਬੈਠੇ ਨੇ ਇਹਦੇ ਉੱਤੋਂ ਕਾ ਵੀ ਲੱਗ ਕੇ ਚਲਾ ਜਾਏਗਾ ਆਪਾਂ ਤਾਂ ਮੁਕਤ ਹੋ ਜਾਏਗਾ ਨਹੀਂ ਤਾਂ ਸਦੀ ਜਨ ਜੂਨੇ ਪੈ ਜਾਊਗਾ ਲੈ ਜੀ ਆਖੋ ਤੁਨ ਸਤਗੁਰੂ ਰਾਮ ਸਿੰਘ ਸਾਹਿਬ ਤੇ ਆਪਾਂ ਤਾਂ ਮੁਕਤ ਹੋ ਜਾਏਗਾ ਤੇ ਜੇ ਜੂਨਾ ਜ ਵੀ ਆਵੇਗਾ ਤਾਂ ਹੰਸ ਦੀ ਜੂਨ ਪੈਗਾ ਜਾਂ ਕਰਨ ਦੀ ਪੈਗਾ ਚੱਲ ਦੇਣ ਬਸ ਕੀ ਹੋਇਆ ਤੁਹਾਨੂੰ ਕੀ ਲੋੜ ਸੀ ਕਿ ਗੰਗਾ ਜਾਣ ਦੀ ਕਹਿੰਦਾ ਮੈਂ ਤਾਂ 21 ਵਾਰ ਹੋ ਕੇ ਆਇਆ ਆ ਆਇਆ ਕਹਿੰਦਾ ਕਿ ਤੁਹਾਨੂੰ ਤਾਂ ਜਾਂ ਚਕਰਵਰਤੀ ਰਾਜਾ ਹੋਣਾ ਚਾਹੀਦਾ ਤੇ ਜਾਂ ਜਗਤਗੁਰੂ ਹੋਣਾ ਚਾਹੀਦਾ ਕਹਿੰਦਾ ਪੜਤਾ ਛੱਡ ਪਰਾਂ ਆਈ ਵਾਰ ਗਿਆ ਅਜੇ ਤੱਕ ਪ੍ਰਮਾਤਮਾ ਦਾ ਦਰਸ਼ਨ ਨਹੀਂ ਹੋਇਆ ਅਖੇ ਤੁਹਾਨੂੰ ਉੱਥੇ ਜਾਣ ਦੀ ਕੀ ਲੋੜ ਹੈ ਤੁਸੀਂ ਤਾਂ ਆਪ ਤਰਲੋਕ ਕੀ नाथ ਹੋ ਕਹਿੰਦਾ ਰਹਿਣ ਦੇ ਬਾਕੀ ਤੇ ਉੱਥੋਂ ਦੇ ਪੰਡਤਾਂ ਨੇ ਪੈਸੇ ਖੋਲਣ ਚਾਹ ਨਹੀਂ ਇੱਕ ਬਚਾ ਕੇ ਲਿਆ ਸੈਂ ਤੂੰ ਲੈ ਲੈ ਉਨੇ ਕਿਹਾ ਮੈਨੂੰ ਚੁਆਨੇ ਦੀ ਲੋੜ ਤਾਂ ਨਹੀਂ ਪਰ ਜੇ ਕਹਿੰਦੇ ਜੀ ਤੁਸੀਂ ਲੈ ਲੈਣਾ ਸਾਨ ਸਫਾ ਸਭ ਕੁਝ ਯਾਦ ਕਰਕੇ ਕਹਿ ਲਗੇ ਦਿੱਤਾ ਰੱਖਿਓ ਜਿਦ ਦਿਨ ਗੱਦੀ ਤੇ ਬੈਠੇ ਹੋਗੇ ਤੁਹਾਡੇ ਉਤੇ ਚੋਰ ਝੁੱਲੇਗਾ ਉਦੋਂ ਤੁਹਾਨੂੰ ਖਾ ਕੇ ਮੰਜੋ ਲੈਣਾ ਨਾ ਮਾਣਾ ਕਹਿ ਪੰਡਿਤ ਜੀ ਪ੍ਰਸ਼ਾਦਾ ਛਕਣਾ ਜੀ ਉਹਨਾਂ ਦਾ ਖਿਆਲ ਦੇਣਾ ਕਹਿੰਦਾ ਹਾਂ ਖੋਲਿਆ ਜੇ ਦੋ ਪ੍ਰਸ਼ਾਦੇ ਸੀ ਤੇ ਇੱਕ ਪੰਡਿਤ ਨੂੰ ਦੇ ਦਿੱਤਾ ਤੇ ਇੱਕ ਆਪਣੇ ਕੋਲ ਰੱਖ ਲਿਆ ਜੇ ਚਾਰ ਸੀ ਤੇ ਦੋ ਨੂੰ ਦੇ ਤੇ ਦੋ ਕੋਲ ਰੱਖ ਲੈ ਪੰਡਤ ਨੇ ਕਿਹਾ ਜੀ ਮੈਂ ਪ੍ਰਸ਼ਾਦਾ ਤਾਂ ਛਕਿਆ ਹੋਇਆ ਹੈ ਪਰ ਵੈਸੇ ਆ ਤੁਹਾਡੇ ਕੋਲੋਂ ਪ੍ਰਸ਼ਾਦ ਲੈਣਾ ਮੈਨੂੰ ਇਉਂ ਜਾਪਦਾ ਜਿਵੇਂ ਭਗਵਾਨ ਰਾਮਚੰਦਰ ਤੇ ਕ੍ਰਿਸ਼ਨ ਦੇ ਹੱਥੋਂ ਲੈਣਾ ਹੁੰਦਾ ਲਿਓ ਦੇ ਦੇ ਜੇ ਲੈ پکڑ ਕੇ ਤੇ ਪਹਿਲੀ ਬੁਰਕੀ ਤੋੜ ਕੇ ਪੰਡਤ ਜੀ ਖਾਣ ਲੱਗੇ ਚੇਤਾ ਆ ਗਿਆ ਕਹਿੰਦੇ ਜੀ ਤੁਹਾਡਾ ਗੁਰੂ ਕੌਣ ਹੈ ਹੁਣ ਬਈ ਸੱਜਣ ਮੈਨੂੰ ਤਾਂ ਬੇਸ਼ੱਕ ਇਹਦੇ ਬਖਵਾਸੇ ਸੂਰਜਪੁਰ ਘਾਟ ਦਾ ਨਾਨਾ ਮਾੜਾ ਕਹਿੰਦਾ ਕਿਹਾ ਤਾਂ ਮੰਨ ਲਿਆ ਕਹਿੰਦਾ ਤੁਹਾਡਾ ਗੁਰੂ ਕੌਣ ਹੈ ਗੁਰੂ ਕੀ ਹੁੰਦਾ ਕਹਿੰਦਾ ਗੁਰੂ ਕੋਈ ਨਹੀਂ ਹੈ ਤਾਰੇ ਆਖੇ ਨਹੀਂ ਫੜ ਕੇ ਚੁੱਕ ਕੇ ਮਾਰਿਆ ਝੋਟੀ ਦੇ ਵਿੱਚ ਕਹਿਣ ਲੱਗਾ ਇਹੋੀ ਗੱਲ ਹੈ ਰੱਬ ਵੀ ਖੁਦਾ ਵੀ ਜੇ ਤੈਨੂੰ ਖੁਦਾਈ ਦੇ ਦਿੰਦਾ ਤੇ ਦੇ ਦਿੱਤੀਏ ਤੇ ਕਦੇ ਨਹੀਂ ਮਿਲ ਸਕਦੇ ਜਦ ਤੱਕ ਤੈਨੂੰ ਗੁਰੂ ਨਾ ਮਿਲੇ ਜਦ ਤੱਕ ਤਨ ਗੁਰਾ ਹੈ ਨਾ ਕਾ ਹੈ ਨਾ ਬੁਰਾ ਮੈਂ ਜਿਹੜਾ ਤੇਰੇ ਕੋਲ ਟਾਈਮ ਖੋਰ ਖਰਾਬ ਕੀਤਾ ਮੈਨੂੰ ਅਫਸੋਸ ਹੈ ਕਿ ਹੁਣ ਤੱਕ ਮੈਨੂੰ ਗੁਰੇ ਦਾ ਦਰਸ਼ਨ ਇਹ ਨਾ ਕਰ ਤੇ ਮੈਂ 70 ਸਾਲ ਤੱਕ ਹੁਣ ਤੱਕ ਮਿੱਟੀ ਛਾਂਦਾ ਰਿਆ ਕਹਿਣ ਲੱਗਾ ਮਿੱਟੀ ਵਿੱਚੋਂ ਕੁਝ ਲੱਭ ਲੈਂਦਾ ਤੂੰ ਤਾਂ ਥੇ ਸ਼ਾਂਤ ਰਿਆ ਕੁਝ ਵੀ ਤੇਰੇ ਹੱਥ ਨਹੀਂ ਲਿਆ ਜਾ ਜੇ ਕੰਮ ਚੰਗਾ ਕਿਤੇ ਲੈ ਆਵੇਂ ਜੇ ਤੇਰੇ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਵਸਦਾ ਹੁੰਦਾ ਤਾਂ ਗੰਗਾ ਤੈਨੂੰ ਗਊ ਬਣ ਕੇ ਆ ਕੇ ਦੁੱਧ ਪਿਲਾਉਂਦੀ ਬੱਦਲ ਬਣ ਕੇ ਤੇਰੇ ਉੱਤੇ ਬਰਸ ਜਾਂਦੀ ਤੂੰ ਕੀ ਸਮਝਦਾ ਬੜਾ ਦਿਲ ਵਿੱਚ ਅਫਸੋਸ ਟੁੱਟਿਆ ਜਾਂ ਦਿਲ ਜਿਸਮੋ ਕੇ ਟੁੱਟੁਰ ਪਿਆ ਜਿਲੇ ਟੁੱਟ ਪਿਆ ਅੱਖ ਲੱਗਾ ਹੁਣ ਮੈਂ ਕੀ ਕਰਾਂ ਜਿਸਮੋ ਕੇ ਤੇ ਘਰੇ ਇਸੇ ਬਜ਼ੁਰਗ ਦੇ ਭਰਾ ਦੀ ਨੂੰਹ ਸੀ ਗੁਰੂ ਅੰਗਦ ਦੇ ਪਾਸ਼ਾ ਦੀ ਬੱਚੀ ਬੀਬੀ ਅਮਰੋ ਬੀਬੀ ਅਮਰੋ ਨੇ ਇੱਕ ਜਥਾ ਬਣਾਇਆ ਸੀ ਜਿਵੇਂ ਬੀਬੀਆਂ ਦਾ ਜਥਾ ਹੁੰਦਾ ਹੈ ਉਸ ਤਰ੍ਹਾਂ ਘਰ-ਘਰ ਵਿੱਚ ਕੀਰਤਨ ਕਰਨਾ ਸ਼ਬਦ ਪੜ੍ਹਨੇ ਤੇ ਬੀਬੀ ਅਮਰੋ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਚੌਕੜਾ ਮਾਰ ਕੇ ਸ਼ੁਰੂ ਕਰਤਾ ਪਾਠ ਗੰਗਾ ਸਤਨਾਹ ਕਰਤਾ ਪੁਰਖ ਨਿਰਭਉ ਨਿਰਵੈਰ ਇਹਦਾ ਕੇ ਜਾਗਦਾ ਸੀ ਪਿਆ ਉਹਨਾਂ ਨੂੰ ਕਿੱਥੇ ਨਿੰਦਰ ਕਬੀਰ ਬਾਗੀ ਪਾਂ ਫਿਰ ਕਬੀਰ ਗਲੀਆਂ ਦੇ ਵਿੱਚ ਤੇ ਲੋਕਾਂ ਨੇ ਕਿਹਾ ਕਬੀਰ ਤੇ ਨੀਂਦ ਨਹੀਂ ਆਉਂਦੀ ਕਬੀਰ ਕਹਿੰਦਾ ਜਿੰਨੂ ਕੁਛ ਜਾਣੇ ਹੋ ਹੀ ਤਿੰਨ ਸੁਖ ਰਹਿਣ ਬਿਹਾਏ ਹਮ ਜੋ ਬੂਝਨ ਬੂਝਿਆ ਪੂਰੀ ਪਰਿਬਲਾਈ ਅਸਾਂ ਜੋ ਬੁਝ ਲਿਆ ਵੀ ਇੱਥੇ ਨਹੀਂ ਰਹਿਣਾ ਜੇ ਸਾਡੇ ਕੋਲ ਬਚਪਨ ਨਹੀਂ ਰਿਹਾ ਜਵਾਨੀ ਵੀ ਨਹੀਂ ਰਹੀ ਤੇ ਹੁਣ ਚਿੱਟੇ ਆ ਗਏ ਨੇ ਤੇ ਇਹਨਾਂ ਵੀ ਨਹੀਂ ਰਹਿਣਾ ਢੱਟ ਗਏ ਚਾਰੇ ਜ਼ਿੰਦਗੀ ਦਾ ਮਹਿਲ ਖੋਲਾ ਹੋ ਗਿਆ ਗੁੱਲ ਦੀਵੇ ਹੋ ਗਿਆ ਕੰਨਾਂ ਤੋਂ ਬੋਲਾ ਹੋ ਗਿਆ ਬਾਲਮ ਕਾਇਸ ਖੰਡਰਾਤ ਨੂੰ ਲੋਕ ਸਾਰੇ ਕਹਿਣਗੇ ਆਈ ਹਨੇਰੀ ਮੌਤੀ ਤੇ ਵਾਹ ਬਰੋਲਾ ਹੋ ਗਿਆ ਜਸਤੀ ਤੰਦੀ ਇਨੀ ਕੋਏ ਪਹਿਲੇ ਖਾਕ ਖਾਕ ਤੋਂ ਖਾਣਾ ਖਾਣੋਂ ਖੂਨ ਬਨਾਇਆ ਖੂਨੋਂ ਬਿੰਦ ਬਿੰਦ ਤੋਂ ਬਾਲਕ ਵਿੱਚ ਜਵਾਨੀ ਆਇਆ ਗਈ ਜਵਾਨੀ ਆ ਬੁਢਾਪੇ ਮੂੰਹ ਮੌਦੇ ਪਾਇਆ ਖਾਕੋਂ ਪੈਦਾ ਹੋ ਕੇ ਬਾਲਮ ਖਾਕ ਦੇ ਵਿੱਚ ਸਮਾਇਆ ਚੀਜ਼ ਤਾਂ ਇਹ ਨਹੀਂ ਬਸ ਜੇਲੇ ਜਗ ਆਈ ਹੋਈ ਤੇ ਬੈਠਾ ਹੋਇਆ ਤੇ ਜੇਲੇ ਬੀਬੀ ਨੇ ਕੀਤਾ ਪਾਠ ਇੱਕ ਓੰਕਾਰ ਇਸ ਰੰਗ ਵਿੱਚੋਂ ਨਿਆਣ ਕੇ ਕਿਹਾ ਉਹਦੇ ਕਿਲੇ ਤੇ ਜੱਠੰਡ ਪੈ ਆ ਪਹਿਲੀ ਵਾਰ ਸੀ ਜਦੋਂ ਸੁਣਿਆ ਉੱਠ ਕੇ ਬੈਠ ਗਿਆ ਜਿਵੇਂ ਜਿਵੇਂ ਪਾਠ ਹੁੰਦਾ ਜਾਂਦਾ ਹੈ ਉਸ ਦੇ ਮਨ ਦੇ ਉੱਤੇ ਮਹਿਰ ਉਤਰਦੀ ਜਾਂਦੀ ਤੇ ਉਤਰ ਕੀਮਤੀ ਸ਼ੀਸ਼ਾ ਹੋਵੇ ਜੇ ਉਹਦੇ ਉੱਤੇ ਪਿਆ ਹੋਵੇ ਤਾਂ ਆਪਣਾ ਤਾਂ ਜਿਹੜਾ ਅੰਦਰ ਆਤਮਾ ਹੈ ਉਹ ਫਰੇਮ ਹੈ ਜਿਸ ਵਿੱਚ ਕਰਤਾਰ ਦੀ ਫੋਟੋ ਜੜੀ ਹੋਈ ਹੈ ਪਰ ਜਿਹਨ ਦੇ ਉੱਤੇ ਵਿਕਾਰ ਰੂਪੀ ਮਿੱਟੀ ਹੈ ਤਾਂ ਦਰਸ਼ਨ ਨਹੀਂ ਹੋ ਸਕਦਾ ਯਾਦ ਰੱਖੇ ਇਹਗਾ ਆਪਣੇ ਅੰਦਰ ਹੀ ਹੈ ਹੁਆ ਤਾਂ ਜਾਇਆ ਜਾਂ ਇਹੀ ਨਾ ਹੋ ਫਿਰ ਕੀ ਸੀ ਜਿਸ ਲਈ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ ਇਥੇ ਪੋਪ ਪਿਆ ਤੇ ਫਿਰ ਕਹਿਣ ਲਗਾ ਹਾ ਹਾ ਹਾ ਜਿਸ ਸ਼ਾਂਤੀ ਨੂੰ ਲੱਭਦੇ ਲੱਗਿਆ 70 ਸਾਲ ਟਕਰਾ ਖਾਣਾ ਤੇ ਕੁਝ ਮਿਲਿਆ ਨਹੀਂ ਪਤਾ ਨਹੀਂ ਇੱਕ ਬੱਚੀ ਨੇ ਕਿੱਥੋਂ ਲਿਆ ਪਰ ਜਗਤ ਮਰਿਆਦਾ ਇਹ ਹੈ ਸੌਰਾ ਸੌਰਾ ਤੇ ਨੋ ਹਮ ਕਲਾਮ ਨਹੀਂ ਹੋ ਸਕਦੇ ਪਰ ਮੈਂ ਤਾਂ ਬੁਲਾ ਲੈਣਾ ਮੈਂ ਜਗਤ ਮਰਿਆਦਾ ਤੋੜ ਦੇਣੀ ਹੈ ਤੇ ਜਿਸ ਨੇ ਗੱਲ ਕੀਤੀ ਤੇ ਜਿਹਨੇ ਬੀਬੀ ਅਮਰੂ ਆਪਣਾ ਅੰਦਰ ਬਾਹਰ ਸਫਾਈ ਕਰਦੀ ਫਿਰਦੀ ਸੀ ਜਿਹੜਾ ਤੇ ਬਜ਼ੁਰਗ ਪਾਬਾ ਆਣ ਕੇ ਕਹਿੰਦਾ ਬੇਟਾ ਮੈਂ ਜਗਤ ਮਰਿਆਦਾ ਦੀ ਉਲੰਘਣਾ ਕਰਨ ਲੱਗਾ ਪਰ ਮਜਬੂਰ ਹਾਂ ਮੈਂ ਚਾਰ ਵੇਦ ਸਤਾਈ ਸਿੰਮਰ ਦੀਆਂ 18 ਪੁਰਾਨ ਚ ਸਭ ਕੁਝ ਪੜ ਕੇ ਦੇਖੇ ਮੈਨੂੰ ਕੁਝ ਪ੍ਰਾਪਤ ਨਹੀਂ ਹੋਇਆ ਇੱਕ ਵਾਰ ਗੱਜ ਕੇ ਆਖੋ ਤਨ ਸਾਧਗੁਰੂ ਰਾਮ ਸਿੰਘ ਸਾਹਿਬ ਸੱਚੇ ਪਾਤਸ਼ਾਹ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਇੱਕ ਮੰਦਿਰ ਪਿੰਡ ਹੈ ਉਥੋਂ ਦਾ ਇੱਕ ਮਹਾਪੁਰਸ਼ ਜਿਸ ਦਾ ਕਿ 12 ਸਾਲ ਦੀ ਉਮਰ ਦੇ ਚ ਅੰਮ੍ਰitsar ਆਇਆ ਅੰਮ੍ਰitsar ਆ ਕੇ ਤੇ ਸਾਰਾ ਗ੍ਰੰਥ ਸਾਹਿਬ ਪੜਿਆ ਉਸ ਤੋਂ ਹੁਮਣੀ ਸਾਹਿਬ ਦੇ ਪਾਠ ਕਰੇ ਸਭ ਕੁਝ ਕਰੇ ਪਰ ਮਨ ਦੇ ਵਿੱਚ ਅਗਨਿ ਹੋ ਲੱਗੀ ਹੋਈ ਸੀ ਕਿ ਹੱਥੋਂ ਜ਼ਿਆਦਾ ਪੀ ਕੀ ਕਰਾਂ ਬੜਾ ਦੁਖੀ ਇੱਕ ਦਿਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਸ਼ਾ ਦਰਬਾਰ ਵਿੱਚ ਖਲੋ ਕੇ ਕਹਿੰਦਾ ਸਾਹਮਣੇ ਹੈ ਗੁਰੂ ਰਾਮਦਾਸ ਸੱਚੇ ਪਾਸ਼ਾ ਤੇਰੇ ਚਰਨਾਂ ਦੇ ਵਿੱਚ ਮੇਰੀ ਬੇਨਤੀ ਏ ਮੈਂ ਵੇਦ ਗ੍ਰੰਥ ਦੁਨੀਆ ਦੇ ਸਾਰੇ ਚਾਰ ਵੇਦ ਪੜ੍ਹ ਕੇ ਦੇਖਣੇ ਸ਼ਾਸਤਰ ਪੜ੍ਹ ਕੇ ਦੇਖਣੇ ਸਭ ਕੁਝ ਪੜ੍ਹਿਆ ਮੈਨੂੰ ਸ਼ਾਂਤੀ ਨਹੀਂ ਆਈ ਕਿਰਪਾ ਕਰਕੇ ਦਰਸ਼ਨ ਦੇ ਤੱਕ ਨੂੰ ਦੇ ਤਾਂ ਸਾਹਮਣੇ ਰਾਮ ਸਿੰਘ ਦੀ ਫੋਟੋ ਆਈ। ਉਹ ਘੜਿਆ ਜਾਂਦਿਆਂ ਜਾਂਦਿਆਂ ਜਿਸਮੋਹ ਕਹਿੰਦੇ ਕਹਿਣ ਲੱਗਾ ਹੁਣ ਮੈਨੂੰ ਪਤਾ ਤਾਂ ਹੈਗਾ ਕੋਈ ਜਿਹੜਾ ਮੈਨੂੰ ਕਹਿ ਗਿਆ ਨਾ ਮੇਰਾ ਸੱਜਣ ਹੈ ਨਾ ਮੇਰਾ ਮਿੱਤਰ ਹੈ ਨਾ ਉਹ ਮੇਰਾ ਦੁਸ਼ਮਣ ਹੈ ਮੈਨੂੰ ਇਹ ਨਹੀਂ ਗੱਲ ਕਹਿ ਗਿਆ ਜੇ ਦੁਨੀਆ ਦੇ ਉੱਤੇ ਸਭ ਸੁੱਖ ਲੈਣਾ ਚਾਹਣਾ ਹੈ ਸ਼ਾਂਤੀ ਲੈਣੀ ਚਾਹਣਾ ਹੈ ਆਪਣੇ ਮਨ ਨੂੰ ਅਡੋਲ ਰੱਖਣਾ ਚਾਹਣਾ ਹੈ ਤਾਂ ਭੈਣੀ ਸਾਹਿਬ ਆ ਜਾ ਪਰ ਕਹਿੰਦਾ ਮੈਂ ਤਾਂ ਮੰਨਾਂਗਾ ਜੇ ਹੱਥ 'ਚ ਗੜਵਾ ਆਵੇ ਤੇ ਮੈਨੂੰ ਆਪ ਆ ਕੇ ਰਾਹ ਚ ਮਿਲੇ ਇਕਲਾ ਗੱਜ ਕੇ ਆ ਕੋ ਸੰਤ ਸਤਗੁਰੂ ਰਾਮ ਸਿੰਘ ਸੱਜੇ ਪਾਸੇ ਗਰੀਬ ਨੂੰ ਆਜ ਪਾਸ਼ਾ ਦੇ ਹੱਥ ਚ ਗੜਵਾ ਤੇ ਭੈਣੀ ਸਾਹਿਬ ਇਧਰ ਆ ਕਾਲ ਵੱਲੋਂ ਉਹ ਆਰੇ ਅਸੀਂ ਤੇ ਇਸ ਦੇ ਪਾਸ਼ਾ ਬਰ ਜਾ ਡੇ ਕਹਿਣ ਲਗੇ ਐਸੋ ਸੱਚੇ ਪਾਸ਼ਾ ਰੱਖਦੇ ਸੀ ਕਮਰ ਕਸਾ ਗਲ ਵਿੱਚ ਕੁਛ ਨਹੀਂ ਰੱਖਦੇ ਪਿਸ਼ਾਰਾ ਗੋਡਿਆਂ ਤੱਕ ਤੇ ਐਵੇਂ ਕਰਕੇ ਕਮਰ ਰੱਖਣਾ ਸਿਰ ਦੇ ਉੱਤੇ ਦਸਤਾਰ ਦਸਤਾਰ ਦੇ ਵਿੱਚ ਖੰਡਾ ਰੱਖਦੇ ਹੁੰਦੇ ਸੀ ਹੱਥ ਵਿੱਚ ਲੋਹਤਰ ਰੱਖਣਾ ਹੀ ਗੜਵਾ ਤੇ ਵੇ ਕਿ ਤੇ ਮਸਤਾਨਾ ਹੋ ਗਿਆ ਕਹਿਣ ਲੱਗੇ ਹੋਈ ਬਾਦਸ਼ਾਹ ਸਤਗੁਰੂ ਪਹਿnde ਕਦਨੇ ਆ ਗਿਆ ਰਾਹ ਤੇ ਬਸ ਜਦੋਂ ਰਾਹ ਤੇ ਆ ਗਿਆ ਕਿ ਹਾਂ ਤੇ ਡਰ ਕਰਕੇ ਚੱਲਣਾ ਉਤਲਿਗ ਪਿਆ ਕਹਿਣ ਲਗਾ ਗਰੀਬ ਨੂੰ ਆਜ ਕਿਰਪਾ ਕਰ ਮਿਹਰ ਕਰ ਸਤਗੁਰੂ ਸਤੇ ਪਾਸ਼ਾ ਨੇ ਆਖਿਆ ਚਲੋ ਜਿੱਤ ਜਗ੍ਹਾ ਉੱਤੇ ਬੈਠ ਕੇ 12 ਵਾਰ ਸਤਗੁਰੂ ਸਤੇ ਪਾਸ਼ਾ ਤਬ ਭਜਨ ਤੇ ਸਭ ਕੀਤਾ ਸੀ 12 ਸਾਲਾਂ ਦੇ ਵਿੱਚ ਜਾ ਪ੍ਰਸ਼ਾਦਾ ਛਕ ਲਿਆ ਤੇ ਜਨਰਲ ਦਿਸ਼ਾ ਗਏ ਨੇ ਲਗੂ ਸ਼ੰਕਾ ਕੀਤਾ ਔਰ ਕਿਤੇ ਜਗ੍ਹਾ ਤੇ ਨਹੀਂ ਗਏ ਤੇ ਬੈਠ ਕੇ ਤਬ ਕੀਤਾ ਕਾਰ ਉਹ ਮੌਨ ਗਿਆ ਜਨਨਾ ਅਕਾਲ ਪੁਰਖ ਤਬ ਹੁੰਦਾ ਹੁਣ ਵੀ ਆਦਮੀ ਉੱਥੇ ਜੇ ਮਨ ਸ਼ੁੱਧ ਹੋਵੇ ਤਾਂ ਜਾ ਕੇ ਬਹਿ ਜਾ ਤੋ ਉਹਨੂੰ ਇਉਂ ਜਪਦਾ ਜਿਵੇਂ ਕਿਤੇ ਮੈਂ ਸਵਰਗਾਂ 'ਚ ਬੈਠਾ ਆ ਤੇ ਬਦੋ ਬਦ ਭਜਨ 'ਤੇ ਬੁਰਦਾ ਤੇ ਮਸਤਾਨੇ ਨੂੰ ਇੱਥੇ ਉਹਨਾਂ ਪ੍ਰਸ਼ਾਦਾ ਸ਼ਿਕਾਇਤ ਦਿੱਤੀ ਤੁਰ ਸਿੰਘ ਜੀ ਸੱਚੇ ਪਾਸ਼ਾ ਨੇ ਜਦੋਂ ਉਹਨਾਂ ਨੇ ਜਾ ਕੇ ਤੇ ਰਾਏਕੋਟ ਦੇ ਬਿਚਰ ਨੂੰ ਤਬਾਹ ਕੀਤਾ ਤੇ ਉੱਥੇ ਸਾਰਾ ਕੁਝ ਕੀਤਾ ਇੱਥੇ ਲੰਗਰ ਸ਼ਿਕਾਇਤ ਜਦੋਂ ਮਸਤਾਨੇ ਨੇ ਕਿਹਾ ਸਾ ਜ਼ਰੂਰ ਜਾਣਾ ਸੰਗੁਰੂ ਤੇਗ ਬਾਹਦਰ ਨੇ ਕਿਹਾ ਜਾਣਾ ਮਾਰੇ ਕਿੰਨੇ ਜੀ ਗੁਰੂ ਤੇਗ ਬਾਹਦਰ ਦਾ ਹੁਕਮ ਤੇ ਆਓ ਸ਼ਾਇਦੋ ਮੈਂ ਤੁਹਾਨੂੰ ਆਪਣੇ ਅਸੀ ਪ੍ਰਸ਼ਾਦਾ ਸ਼ਿਕਾਇਨਾਵਾਂ ਆ ਪ੍ਰਸ਼ਾਦਾ ਸ਼ਿਕਾਇਆ ਅੰਬਰ ਸਰਦਾਰ ਜੇਕਰ ਜਾ ਕੇ ਬੁਚਰਖਾਨਾ ਵੜਿਆ ਇਸ ਵਾਸਤੇ ਵੜਿਆ ਕਿ ਤਲਾਬ ਸਾਡਾ ਸੀ ਔਰ ਸਾਡੀ ਪਵਿੱਤਰਤਾ ਹੈ ਇਸ ਵਾਸਤੇ ਸਦਾਰੀ ਸਸਨ ਦੇ ਕੋਲ ਜਿਹੜੀ ਇੱਥੇ ਉਹਨੇ ਤਕਰੀਰ ਕੀਤੀ ਹੈ ਦੂਸਰੇ ਨੇ ਮਿਲਾਪ ਦੇ ਐਡੀਟਰ ਨੇ ਰਣਵੀਰ ਨੇ ਫੋਕੀ ਤੇ ਸੁਣ ਕੇ ਦੇਖੋ ਉਸਨੇ ਆਪਣੇ ਅੰਦਰ ਦੇ ਵਿੱਚੋਂ ਕਿਵੇਂ ਗੱਲਾਂ ਕੱਢ ਕੱਢ ਕੇ ਦਸੀਆਂ ਨੇ ਵੀ ਉਹ ਕੀ ਚੀਜ਼ ਸੀ ਔਰ ਕਿਸ ਤਰ੍ਹਾਂ ਉਹਨਾਂ ਨੇ ਆਣ ਕੇ ਸੁਤੰਤਰਤਾ ਪੈਦਾ ਕੀਤੀ ਇਹੋ ਹੀ ਇੱਕ ਸਿਕਸਨ ਹੋਰ ਬਾਕੀ ਸਾਰੇ ਅੰਗਰੇਜ਼ ਦੇ ਸਿਕਸਨ ਇਹੋ ਹੀ ਇੱਕ ਸਿਕਸਨ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਦੇ ਸਿਕਸਨ ਜਿਨ੍ਹਾਂ ਨੇ ਅੰਗਰੇਜ਼ ਨੂੰ ਲਤ ਮਾਰੀ ਔਰ ਅੰਗਰੇਜ਼ ਦੇ ਕਿਸੇ ਆਣ ਨੂੰ ਨਾ ਮੰਨਿਆ ਅੰਗਰੇਜ਼ ਦਾ ਹੀ ਮਰੇ ਬੜਾ ਵੱਡਾ ਜਸੂਸੀ ਜਿਸ ਨੂੰ ਮੁਕਾਲਫ ਮੁਕਾਲਫ ਕਹਿ ਕੇ ਮੁਕਾਲਫ ਕਰਕੇ ਮੁਕਾਲਫ ਕਹਿੰਦੇ ਨੇ ਹੁਣ ਦਾ ਨਾਮ ਮੁਕਾਲਫ ਸਿੰਘ ਵੀ ਕਹਿਣ ਲੱਗ ਪਿਆ ਪਰ ਉਸਨੇ ਜੋ ਸਿੱਖਣ ਇਤਿਹਾਸ ਨੂੰ ਤਬਾਹ ਕੀਤਾ ਤੇ ਉਹਦੇ ਆਥੇ ਲੱਗ ਜਿਹੜੇ ਗਏ ਉਹਨੂੰ ਕਹਿੰਦੇ ਇਹ ਅੰਗਰੇਜ਼ ਦੇ ਸਿੱਖਣ